ਮੈਂ ਦੇਖਿਆ ਭਈ ਜਿਸ ਤਰ੍ਹਾਂ ਤੇ ਤੁਸੀਂ ਗਾਉਨੇ ਹੋ ਉਹ ਕੋਈ ਹੋਰ ਮੁੰਡੇ ਵੀ ਤੁਹਾਡੀ ਰੀਸ ਕਰਨ ਲੱਗੇ ਨੇ ਲੇਕਿਨ ਸਭ ਤੋਂ ਵਧੀਆ ਗੱਲ ਮੈਨੂੰ ਤੁਹਾਡੀ ਇਹ ਲੱਗਦੀ ਆ ਕਿ ਤੁਸੀਂ ਆਪ ਕ੍ਰਿਟਿਕ ਆਪ ਵੀ ਹੋ ਆਪ ਦੀ ਨੁਕਤਾਚੀਨੀ ਆਪ ਵੀ ਕਰ ਲਏ ਨੇ ਕਿ ਐਵੇਂ ਸਾਲਾ ਗਾਈ ਜਾਂਦਾ ਇੱਕੋ ਤਰਕ ਤੇ ਗਾਈ ਜਾਂਦਾ ਤੁਸੀਂ ਆਪਣੇ ਗੀਤ ਦੇ ਵਿੱਚ ਆਪਣੇ ਬਾਰੇ ਵੀ ਜਿਹੜਾ ਐਨਾਲਿਸਿਸ ਕਰਦੇ ਹੋ ਉਹ ਬੜਾ ਓਨੈਸਟ ਤੇ ਬੜਾ ਸਿੱਧਾ ਸਾਦਾ ਬਹੁਤ ਹੀ ਇਮਾਨਦਾਰੀ ਵਾਲਾ ਇਸ ਗੱਲ ਕਰਕੇ ਚੰਗੀ ਲੱਗੀ ਮੈਨੂੰ ਚੰਗੀ ਲੱਗੀ ਮੈਨੂੰ ਬੰਦੇ ਨੂੰ